ब्रह्म ज्ञानी ब्रह्म का बेटा हां मतलब ब्रह्म ज्ञानी है वो देखो ब्रह्मा दी जानकारी हुंदी है उन बेटा जानकार होता है बेटा हां बेटा जानकार सबज रखने वाला ब्रह्म दी सोची रखने वाला होता है ब्रह्म बारे ज्ञान रखने वाले नु ब्रह्म ज्ञानी कहते हैं ਬ੍ਰਹਮ ਗਿਆਨੀ। ਦਾਰਮਿਕ ਕਥਾਾਂ ਜਾਇ ਅਦਾਖਰ ਪ੍ਰਭ ਗਿਆਨੀ ਕਹਾਂ ਉਹ ਬ੍ਰਹਮ ਦੀ ਉਹ ਜਾਣਕਾਰੀ ਆ ਬ੍ਰਹਮ ਦੀ ਉਹ ਜਾਣਕਾਰੀ ਤੇ ਭੁਗਤੀ ਗਿਆਨੀ ਨੂੰ ਛੱਡੋ ਤੁਸੀਂ ਅੱਗੇ। ਬ੍ਰਹਮ ਹੈ ਆ ਬ੍ਰਹਮ ਗਿਆਨੀ ਹੋ ਤੇ ਆ ਤੂੰ ਉਹਦੀ ਛੱਡਵਾਏ ਦੀ ਉਹ ਲੈ ਲਓ। ਇਹ ਹੀ ਕਥਨ ਹੁੰਦਾ। ਬ੍ਰਹਮ ਗਿਆਨੀ ਪ੍ਰਿਮੇ ਯਾਨੀ ਇੱਕ ਸੰਵੇਦਤਾ ਪ੍ਰਿਮੇ ਯਾਨੀ ਦਾ ਹਿੱਤ ਇੱਕ ਨਾਲ ਜੋਤ ਨਾਲ ਜੁੜਿਆ ਹੋਣਾ ਦੂਈ ਮਾਇਆ ਨਾ ਇਹ ਸੰਵੇਦਤਾ ਦੂਈ ਮਾਇਆ ਇੱਕ ਸੱਚ ਹੈ ਜੋਤ ਨਾਲ ਉਹਦਾ ਹਿੱਤ ਜੁੜਿਆ ਹੋਇਆ ਹੈ ਉਹਨਾਂ ਦੇ ਜੀ ਕੀ ਕੁਝ ਕੁਝ ਪੁੱਛਦਾ ਜੀ ਨਾਲ ਹਿੱਤ ਹੈ ਜਾਤ ਨਾਲ ਹਿੱਤ ਉਹਦੀ ਨਾਲ ਜੇ ਉਹਦੀ ਜਾਤ ਨੂੰ ਕੋਈ ਨਫਾ ਨੁਕਸਾਨ ਹੁੰਦਾ ਹੈ ਉ ਫਿਰ ਮੈਂ ਜੀ ਕੋਈ ਰੋੜਾ ਜੇ ਜਾਤ ਨਾਲ ਦੁੱਖ ਹੁੰਦਾ ਉਹਨੂੰ ਕੋਈ ਰੋੜਨ ਦੇ ਉਹ ਕਹਿੰਦਾ ਹੈ ਭਾਈ ਦਾਰੂ ਆ ਤੂ ਗਿਨੇ ਹਾਂਦਾ ਹੋ ਉਹ ਕਹਿੰਦਾ ਉਹ ਕਹਦਾ ਦੂਸਰੇ ਦਾ ਨਾਮ ਸੁਣਦਾ ਫਿਰ ਖਲਕ ਜਿਆਦਾ ਕੱਲਾ ਨਾਮ ਹੁੰਦਾ ਜਦੋਂ ਉਹ ਗੱਲ ਕਰਦਾ ਹੈ ਕਹਰਾ ਹੈ ਤਾਂ ਜੇ ਉਹ ਪੀਚੇ ਹੀ ਉਹ ਨੁਕਸਾਨ ਦੇ ਉਹਦੇ ਵਾਸਤੇ ਉਹਦੇ ਹਿੱਤ ਦੀ ਗੱਲ ਨਹੀਂ ਜਿੱਤਨਾ ਗੁਰ ਢੁਪਾ ਥੱਲੇ ਡੂ ਉਹ ਨਾ ਯੋ ਉੱਪਰ ਕੱਢਣਾ ਉਹ ਉਹ ਕੱਢਣ ਵਾਲਾ ਨਾ ਉਹ ਕੱਢਣ ਵਾਲਾ ਖੂਚੋ ਜਿੰਨਾ ਕੋਈ ਉੱਤੇ ਚੜ ਗਿਆ ਆਪਣਾ ਮੋਟਾ ਤੇ ਥੱਲੇ ਨੂੰ ਜਾਂਦਾ ਥੱਲੇ ਨੂੰ ਜਾਣ ਵਾਲਾ ਤੇ ਉਹ ਖੜੂ ਹੁੰਦਾ ਯਰ ਬਸਾ ਕੜੇ ਤੇ ਫੇਰ ਥੱਲੇ ਜਾਂਦੇ ਨੇ ਇਹ ਚੱਕੋ ਵਿਆਹ ਉਹ ਜੇ ਕਹਤੇ ਉਹ ਆਖੋ ਕੁਝ ਕੋ ਪੈ ਗਿਆ ਉੱਥੋਂ ਮਿੱਟੀ ਮਰੋਗਾ ਕੋਈ ਨਹੀਂ ਫਰਮੋੜ ਲੈ ਹਰ ਜੁਗ ਜੀਏ ਤੋੜ ਚਰੇ ਗਿਆ ਪਰ ਥਲੇ ਨੂੰ ਨਾ ਡੇ ਤੋ ਹਾਂ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਇਸ ਕਾ ਕੇ ਬ੍ਰਹਮ ਗਿਆਨੀ ਤੇ ਅੰਦਰ ਚਿੰਤਾ ਨਹੀਂ ਹੁੰਦੀ ਅਚਿੰਤ ਕਾ ਲਖਤਾ ਚਿੰਤਾ ਨਹੀਂ ਹੁੰਦੀ ਉੱਥੇ ਬ੍ਰਹਮ ਗਿਆਨੀ ਔਰ ਜਿਹੜੇ ਉਹ ਤੁਹਾਨੂੰ ਸਲਾਹ ਦੇਊਗਾ ਮੈਂ ਤੁਹਾਨੂੰ ਸਲਾਹ ਪ੍ਰਮਾਤਮਾ ਦੀ ਸਲਾਹ ਜਿਹੜੀ ਹੈਗੀ ਆ ਉਹ ਨਿਰਮਲ ਦੀ ਉਹ ਜੋ ਆਪਣਾ ਕੋਈ ਉਹਦਾ ਆਪਣਾ ਲਾਭ ਨਹੀਂ ਕੋਈ ਆਪਣਾ ਹੈ ਤਾਂ ਨਹੀਂ ਹੁੰਦਾ ਪਰ ਸਲਾਹ ਦੇ ਰਹੇ ਨੇ ਸਾਰੇ ਤੁਹਾਨੂੰ ਆਦਮੀ ਜਿਹੜਾ ਆਪਣਾ ਹੈ ਦਰਾ ਤੇ ਸਲਾਹ ਦੇ ਰਿਹਾ ਉਹ ਪ੍ਰਮਾਤਮਾ ਦੀ ਹੁੰਦੀ ਹੈ ਕਹਾਂਦਾ ਉਹ ਤੁਰੇ ਜੀ ਆਪਣਾ ਇਤਰਾਕਾ ਫੈਸਲਾ ਦੇ ਰਹੇ ਸੀ ਰਾਮ ਰਜੇਤੀ ਸੁਣੀਏ ਕੁਝ ਕਰ ਰਹੀ ਸੀ ਕੀ ਹਮਤਾ ਕਰੂ ਰੋ ਹੈ ਰਾਮਣੀਤਾ ਹੈ ਨਹੀਂ ਸੀ ਉਹਨੂੰ पाच ਇਹਨਾਂ ਦੇ ਭਾਈ ਬਲਾ ਉਹ ਦੇ ਰਹੇ ਸੀ ਇਦਾਂ ਕੁਝ ਕਰ ਰਹੇ ਸੀ ਬ੍ਰਮਗੰਨੀ ਜਿਸ ਕਰੇ ਪ੍ਰਭ ਤਾਂ ਹੋਈ ਹੈ ਜੀ ਨੂੰ ਪ੍ਰਭ ਤਾਂ ਫਿਰ ਗੈਦੀ ਨਾਮ ਦੇਣਾ ਤਾਂ ਉਹਨੇ ਉਹ ਪੜ੍ਹਨੀ ਬੜਾਈ ਜੀ ਬ੍ਰਹਮ ਗਿਆਨੀ ਦਾ ਬੜਾ ਪ੍ਰਤਾਪ ਹਾਂ ਬ੍ਰਹਮ ਗਿਆਨੀ ਦਾ ਪ੍ਰਤਾਪ ਜਿਹੜਾ ਹੁੰਦਾ ਦੁਨਿਆਤ ਗਿਆਨ ਗਿਆਨ ਹੈ ਪ੍ਰਤਾਪ ਉਹਦਾ ਉਹਦਾ ਜਿਹੜਾ ਗਿਆਨ ਹੁੰਦਾ ਉਹਦੀ ਜਿਹੜੀ ਉਹਦਾ ਜਿਹੜਾ ਪ੍ਰਭਾਵ ਹੁੰਦਾ ਗਿਆਨ ਦਾ ਪ੍ਰਭਾਵ ਉਹਦਾ ਪ੍ਰਭਾਵ ਹੈ ਗਿਆਨ ਦਾ ਪ੍ਰਭਾਵ ਬੜਾ ਹੁੰਦਾ ਬੜੇ ਬੜੇ ਅੰਦਰ ਪ੍ਰਭਾਵ ਹੈ ਪੜਦੇ ਤੇ ਪੜਾ ਜਿੱਤੇ ਕੋ ਗਿਆਨ ਉਹ ਤੇ ਪ੍ਰਭਾਪੈ। ਬ੍ਰਹਮ ਗਿਆਨੀ ਦਾ ਤਰਸ ਬੜੇ ਬਾਗ ਨਹੀਂ ਪਾਇਆ। ਇਸ ਕਰਕੇ ਬ੍ਰਹਮ ਗਿਆਨੀ ਦਾ ਜਿਹੜਾ ਦਰਸਾ ਹੈ, ਦਰਸਾ। ਬੜੇ ਬਾਗਾ ਸਰੀਰ ਕਰਕੇ ਤਾਂ ਦਰਸ਼ਨ ਹੁੰਦਾ ਹੀ ਨਹੀਂ ਮਤਲਬ ਬ੍ਰਹਮ ਗਿਆਨੀ ਦੀ ਗੱਲ ਵੱਡੇ ਬਾਗਾਂ ਕਰਕੇ ਸਮਝ ਆਉਦੀ ਹੈ। ਬ੍ਰਹਮ ਗਿਆਨੀ ਨਾ। ਮਰਮ ਗਿਆਨੀ ਜੋ ਕੁਝ ਬੋਲਦਾ ਉਦੀ ਜੀ ਦੀ ਖਾਦ ਚ ਬਹਿ ਜਾ ਗੱਲ ਵੱਡੇ ਭੌਦ ਨੇ ਕਹਿ ਰਹੇ ਨੇ ਉਹ ਇਹ ਸਾਰੇ ਬ੍ਰਹਮ ਨੇ ਇਹ ਆਨੇ ਗੁਰਦਰਸ਼ਨ ਲਿਖਿਆ ਜਿਹੜਾ ਇਹ ਦਰਸ਼ਨ ਲਿਖਿਆ ਹੋਇਆ ਇਹ ਸ਼ਾਸਤਰ ਦਰਸ਼ਨ ਸ਼ਾਸਤਰ ਹੈ ਇਹਦੀ ਸਮਝ ਕਿਹਨੂੰ ਆ ਗਈ ਉਹਦੇ ਵੱਡੇ ਭਾਗ ਨਹੀਂ। ਕਿਆ ਕੋਈ ਵਰਪਿਆਤੀ ਬੋਲਦੇ ਸੀ ਜਦੋਂ ਇਹ ਸੰਕਤ ਕਰਦੇ ਸੀ। ਜਦ ਮੈਂ ਭਾਗਾਂ ਵਾਲੇ ਤੇ ਸਮਝ ਲੈਂਦੇ ਆਉਂਦੀ ਸੀ। ਵੱਡੀ ਬੁੱਢੀ ਆਲਿਆਂ ਨੂੰ ਵੱਡੇ ਅਕਲ ਵਾਲਿਆਂ ਨੂੰ ਆਹ ਨੂੰ ਸਮਝ ਆਉਂਦੀ ਸੀ। ਬਸ ਆਹ ਗੱਲ ਹੈ। ब्रह्म ज्ञानी दुन्ण को विचारधारा उदी विचारधारा में जेड़ा पकड़ का गाना ब्रह्म ज्ञानी को बल बल को बल बल जाइए ऐसा करके ब्रह्म ज्ञानी तो बल बल ही जाया जा सकता है और कुछ नहीं किया जा सकता ब्रह्म ज्ञानी को क्यों बल बल जाइए ਗੁਰੂ ਗੰਨੀ ਕੋ ਬਹੁਤ ਬੋਲ ਜਾਈਏ ਇੱਥੇ ਕਿਉਂ ਆਇਆ ਪਿਛਲੇ ਤੋਂ ਨਹੀਂ ਆਇਆ ਇਸ ਪਦੇ ਚੰਗ ਲਾਈਆਂ ਇੱਕ ਤਾਂ ਤਾਂ ਸਵਾਰਥ ਕੋਈ ਨਹੀਂ ਇੱਥੇ ਬਰਕੁਵਰ ਦੇਖੋ ਜਿਹੜਾ ਗੁਰੂ ਗੰਨੀ ਹੈਗਾ ਜਾਗਦਾ ਸਦਾ ਸਦਾ ਹੈ ਉਹ ਕਦੇ ਵਾਸਤੇ ਸਰਸਾ ਚੱਲਦਾ ਹੈ ਜੀਵ ਇਸਤਰੀ ਰੂਪ ਇਸ ਕਰਕੇ ਫਿਰ ਗਾਂਧੀ ਕੇ ਬਲਵਲ ਜਾਈਏ ਪਰਮੇਸ਼ਰ ਜੀ ਬਲਵਲ ਜਾਈਏ ਕਹਿ ਰਿਹਾ ਓਏ ਬੱਚੇ ਆ ਗਿਆ ਬੱਚੇ ਆ ਇਹ ਤਾਂ ਸਿਰਫ ਐ ਗੱਲ ਉਹਦਾ ਇੱਕ ਏਜੰਟ ਉਹਦੇ ਏਜੰਟ ਬਣਿਆ ਜਿਵੇਂ ਆਪਾਂ ਭਗਵਾਨ ਨਾਲ ਪੇ ਦੁਨੀਆ ਕਹਤੇ ਆ ਬਾਹਰ ਕੋਈ ਭੇਜਦੇ ਹੋ ਉਹਨਾਂ ਦਾ ਨਮਾਇੰਦਾ ਫ੍ਰਿਸ਼ਟਾ ਜਿਵੇਂ ਉਹਨਾਂ ਨੇ ਕਿਹਾ ਫ੍ਰਿਸ਼ਟਾ ਹਾਂ ਬ੍ਰਹਮ ਗਿਆਨੀ ਨੂੰ ਖੋਜਣ ਨੂੰ ਹੈ ਸੋ ਇਸ ਕਰਕੇ ਜਿਹੜਾ ਮਹੇਸ਼ਾ ਉਹ ਵੀ ਬ੍ਰਹਮ ਗਿਆਨੀ ਨੂੰ ਖੋਜਦੇ ਜੇ ਕੋਈ ਬ੍ਰਹਮ ਗਿਆਨੀ ਤਾਂ ਉਹ ਫਿਰ ਦਹਾੜਾਂ ਤੇ ਅਸਰ ਜੋ ਖੋਜਦਾ ਰਹਦਾ ਹੈ ਪਾਗਲ ਨਹੀਂ ਰਹਦਾ ਹੈ ਗਿਆਨੀ ਮਰ ਜਾਏ ਮੈਂ ਉਹ ਜਿਹੜੀ ਕਥਾ ਹੈ ਅਮਰ ਕਥਾ ਉਹ ਤੋਂ ਸੁਣ ਲਾ ਤੇ ਅੱਗੇ ਸਾਬ ਉਹ ਉਹ ਖੋਜਦਾ ਫਿਰ ਖੋਜੀ ਉਹ ਮੈਂ ਸਭ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਦ ਕਿ ਨਾਨਕ ਆਖਦਾ ਬ੍ਰਹਮ ਗਿਆਨੀ ਦਾ ਪਰਮੇਸ਼ਰ ਹੋਰ ਖੋਜ ਆਇਆ ਨੂੰ ਖੋਜ ਲਾ ਜੇ ਬ੍ਰਹਮ ਗਿਆਨੀ ਖੋਜਣਾ ਸਿੱਧਾ ਹੀ اے پرمیشر کول ہے جی ایتھے تاں دیکھو ہم یا نیو نہ لُپڑائیں کوئی جنتی لوڑ نہیں ایتھے کوئی جنتی لوڑ نہیں کوئی لوگ لوگ کہیں ہوجھ نہیں دا اسیں ہر کا پر پر تو نہیں چھپے نہ چھپ رہا ہے جنتی لوڑ نہیں ہے جی کھوجن دی لوڑ ہے جو ਦੋਏ ਬ੍ਰਹਮ ਕੇੰਦਰੀ ਗੱਲ ਚੱਲੀ ਜਾਂਦੀ ਐ ਕੋਈ ਜਦੋਂ ਯਾਰੋ ਬ੍ਰਹਮ ਜਾਨੀ ਜਿਸ ਕਰੇ ਪ੍ਰਵਾਹ ਪ੍ਰਭਾਏ ਤੇ ਪੇਟਾ ਕੋਈ ਕਰਕੇ ਜਾਨੀ ਜਿਸ ਕਰੇ ਪ੍ਰਵਾਹ ਨਾਲ ਸਾਹੋਂ ਮੇਰੇ ਬੰਕੇਨੀ ਗੱਲ ਚੱਲਦੀ ਐ ਥੇਨ ਕੋਲ ਕਹਿੰਦੇ ਨਾਮ ਉਹ ਫਿਰ ਕੁਛ ਮੈਨੂੰ ਪੂਰਾ ਹੋਗਾ ਮੈਂ ਦੀ ਬਸ ਰਿਆ ਉਹਦਾ ਕਹਿੰਦਾ ਅਖਰ ਵੀ ਉਹਨੇ ਜੋ ਜੇ ਫਰਮਾਇਆ ਦਿੱਤਾ ਪਾਇ ਉਦਾ ਘਰ ਨਹੀਂ ਜਿਉਂਦਾ ਵਾਰੀ ਬੀਤ ਰਿਹਾ ਆਪੋ ਵੇਖਦੇ ਜਿਨਾ ਫਰਮਾਇਆ ਨੇ ਤਬ ਤੱਕ ਜੇਤਾ ਕੀਤਾ ਤੇ ਤਾ ਨਾ ਆਪਣੇ ਤੇ ਲੈ ਹੀ ਦੀ ਗੱਲ ਜਿਹੜੇ ਆਪਣੇ ਉੱਤੇ ਲੈ ਰਹਾ ਨੇ ਉਹਦੇ ਭੱਲੇ ਕੱਖ ਨਹੀਂ ਜਿਨਾ ਦੇ ਜਿਨਾ ਤੇ ਕਹਾਇਆ ਕਹਾਣੇ ਸੱਚ ਕਹਤਾ ਵੀ ਕਹਾਇਆ ਬੜੀ ਆ ਦਰਿਆ ਦੇ ਨਾਲ ਉਹਨੇ ਆਪਣੇ ਆਪ ਦੀ ਸੰਘਿਆ ਦਿੱਤੀ ਵੀ ਇਹ ਜਿਆਦਾ ਪਾਣੀ ਆ ਰਿਹਾ ਜਾਨਗਲ ਵਿੱਚ ਪਾਣੀ ਦਰਿਆ ਨਾ ਪੈਦਾ ਕਰਦਾ ਨਾ ਪਾਣੀ ਦਰਿਆ ਰੋਕਦਾ ਨਾ ਪਾਣੀ ਸਟੋਰ ਕਰਦਾ ਦਰਿਆ ਨਾ ਉਹ ਜਸ ਸਟੋਰ ਹੁੰਦਾ ਹੁੰਦਾ ਜਦੋਂ ਜਿਆਦਾ ਪਾਣੀ ਆ ਹਾਂ ਨਾ